ਕਾਨ ਜੀ ਉਬਾਜ ਗਵਾਰਨ ਸੋ ਸੁਈਆ ਖੇਲ ਕਰੋ ਹਮ ਸੰਗ ਕਹਿਓ ਆਪਣੇ ਮਨ ਮੈਂ ਕਛ ਸੰਖ ਨਾਇਨ ਝੂਠ ਕਹਿ ਨਹਿਮਾ ਨੋਰੀ ਕਹਿਓ ਹਮਰੋ ਤੁਮ ਸਾਚ ਹਰ ਕੀ ਸੁਣ ਬਾਤ ਗਈ ਤਜ ਲਾਜ ਕਬੈ ਜਸ ਠਾਨੋ ਰਾਤ ਬਿਖੈ ਤਜ ਧੀਲੇ ਕੋ ਨਭ ਬੀਤ ਚਲਿਓ ਜਿਮ ਜਾਤ ਟਨਾਨੋ ਸੁਈਆ ਬ੍ਰਿਖ ਭਾਨ ਸੁਤਾ ਹਰ ਕੇ ਇਤ ਗਾਵਤ ਗਵਾਰਨ ਕੇ ਸੋ ਕਿਦਉ ਗਨ ਇਮਨਾਚ ਇਮਨਾਜ ਦਿਖਾਇਆ ਪਰੀ ਬਿਜਲੀ ਜੇ ਭਾਂਤ ਕਨੇ ਘਨ ਮੈਂ ਕਬਨੇ ਉਕਮਾ ਤਹਿ ਗਾਇਬ ਕੀ ਸੋ ਵਿਚਾਰ ਕਹੀ ਆਪਣੇ ਮਨ ਮੈਂ ਰੁਤ ਚੇਤ ਕੀ ਮੈ ਮਨ ਆਨੰਦ ਕਹਿ ਕੋ ਕਹਿ ਮਨੋ ਕੋ ਕਿਲ ਕਾ ਬਨ ਹਰ ਕੇ ਸੰਗ ਰੰਗ ਪਰੀ ਸੋ ਤਰੀਆ ਸਜ ਸਾਜ ਸਬੈ ਤਨ ਮੈਂ ਅਤਹੀ ਕਰ ਕਹਿ ਖਿਤ ਰਸੋ ਕਰ ਕਹਿ ਨਹੀਂ ਬੰਧਨ ਅਉ ਧਨ ਮੈਂ ਹੁਣ ਤਾਂ ਛਭ ਕੀ ਅਤਿ ਹੀ ਉਪਮਾ ਉਪਧੀ ਕਵ ਸਿਆਮ ਕੇ ਜੋ ਮਨ ਮੈਂ ਮਨੋ ਸ਼ਾਮਨ ਮਾਸ ਕੇ ਮਦ ਵਿਖੈ ਚਮਕੈ ਜਿਵੇਂ ਬਿਜੁਲਤਾ ਘਨ ਮੈਂ ਸਿਆਮ ਸੋ ਸੁੰਦਰ ਖੇਤ ਹੈ ਕਵ ਸਿਆਮ ਕਹੈ ਆਤਿ ਹੀ ਰੰਗ ਰਾਚੀ ਰੂਪ ਸਚੀ ਅਰਪੈ ਰਤ ਕੀ ਮਨ ਮੈਂ ਕਰ ਪ੍ਰੀਤ ਸੋ ਖੇਲ ਤ ਸਾਚੀ ਰਾਸ ਕੀ ਖੇਲ ਟਟੈ ਜਮਨਾ ਰਜਨੀ ਅਰ ਧਿਓਸ ਬਿਧਰਕ ਮਾਤੀ ਚੰਦਰਪਗਾ ਅਰਚੰਦਰਮੁਖੀ ਮ੍ਰਿਗ ਭਾਂ ਸੁਤਾ ਤਜਲਾਜੈ ਨਾਚੀ ਰਾਸ ਕੀ ਖੇਲ ਸੋ ਗਵਾਰਨੀਆਂ ਅਤ ਹੀ ਤਹ ਸੁੰਦਰ ਭਾਂਤ ਰਜੀਐ ਲੋਚਨ ਹੈ ਜਿਨਕੇ ਮ੍ਰਿਗ ਸੇ ਜਿਨਕੇ ਸਮ ਤੁਲ ਨਾ ਰੂਪ ਸਚੀਐ ਕੰਚਨ ਸੋ ਤਿਨ ਕੋ ਤਨ ਹੈ ਮੁਖ ਹੈ ਸਾਸੀ ਸੋ ਤਹ ਰਾधि ਗਚੀਐ ਮਾਨੋ ਕਰੀ ਕਰ ਲੈ ਕਰਤਾ ਸੁਧ ਸੁੰਦਰ ਤੇ ਜੋ ਬਾਕੀ ਬਚੀਐ ਆਈ ਹੈ ਖੇਲਣ ਰਾਸ ਵਿਖੈ ਸੱਜ ਕੈ ਸੋ ਤਨ ਸੁੰਦਰ ਬਾਣੇ ਪੀਤ ਰੰਗੇ ਇਕ ਰੰਗ ਕਸੁੰਭ ਕੇ ਏਕ ਹਰੇ ਏਕ ਕੇ ਸਰਸਾਨੇ ਤਾ ਛਭ ਕੇ ਜਸ ਉੱਚ ਮਹਾ ਕਵਨੈ ਆਪਣੇ ਮਨ ਮੈਂ ਪਹਿਚਾਨੇ ਨਾਚਤ ਭੂਮ ਗਿਰੀ ਧਰਨੀ ਹਰੀ ਦੇਖ ਰਹੀ ਨਹੀਂ ਨੈਣ ਅਗਾਨੇ ਸਵਈਆ ਤੈਨ ਕੋ ਇਤਨੋ ਹਿਤ ਦੇਖਤ ਹੀ ਅਤਿਆਨੰਦ ਸੋ ਭਗਵਾਨ ਹਸੇ ਹੈ ਪ੍ਰੀਤ ਵਢੀ ਅਤਿਗਵਾਰਨ ਸੋ ਅਤ ਹੀ ਰਸ ਕੇ ਹੁਣ ਬੀਜ ਫਸੇ ਹੈ ਜਾ ਤਨ ਦੇਖਤ ਪੁਨ ਬੜੈ ਜੇ ਦੇਖਤ ਹੀ ਸਭ ਪਾਪ ਨਸੇ ਹੈ ਜਿਉ ਸਸ ਅਗਰ ਲਸੈ ਚਪਲਾ ਲਸੇ ਹੈ ਸੰਗ ਗੋਪਨ ਬਾਤ ਕਹੀ ਰਸ ਕੀ ਜੋ ਕੰਨ ਰਹਿ ਸਬਦੈ ਮਰਈਆ ਸਾਧਨ ਕੋ ਜੋ ਹੈ ਵਰਤਾਉ ਸਾਧਨ ਕੋ ਜੋ ਨਾਸ ਕਰੀਆ ਰਾਸ ਬਿਖੈ ਸੋ ਖੇਲ ਤ ਹੈ ਜਸੁਦਾ ਸਤਜੋ ਮੁਸਲੀ ਤਰ ਭਈਆ ਨਨਨ ਕੇ ਕਰ ਕੈ ਸੋ ਕਟਾਛ ਚੁਰਾਏ ਮਨੋ ਮਤੀ ਗੋਪਨ ਲਈਆ ਦੇਵ ਗੰਧਾਰ ਬਿラਵਲ ਸੁਧ ਮਲਾਰ ਕਹੇ ਕਬ ਸਿਆਮ ਸੁਨਾਈ ਜੈਤ ਸਰੀ ਗੁਜਰੀ ਕੀ ਭਲੀ ਧੁਨ ਰਾਮ ਕਲੀ ਹੂਂ ਕੀ ਤਾਨ ਵਸਾਈ सत आवरते सुन कै सुर जी जड जंगम ते सुरजा सुन पाई रास बखए संग वर्ण के भांसों बंसरी कान बजाई दीपक ओ नट नायक राग भली विद गौरी की तान बसाई सोरठ सारंग राम कली सुर जयत श्री शुभ भांस सुनाई रीज रहे पृथ्वी के सबै जन रीज रहयो सुन कै सुर तीर नदी संगवारन के मुरली कर आनंद स्याम बजाई सवैया जेहके मुख की समचन गुरु प्रभा ਕੀ की तेह भा मनोकंचन सी है मनहु लै कर मैं कर्ता सो अनूप सी मूरत या की कसी है चांदनी में गणवारन के एह गणवारन गोपन ते सो हची दोहरा कृष्ण ਕਾ तन निरख कहि विहा फिकय बात मृग के अरभुण मैन के तो मैं सब है घात सैया भाग गोपाल हरयो सुन क्वारन छीन ली मुख ज्योत ससी है नैन मनोह सर तीछन है प्रपटी मन जानक ਕੋ ਬੈਨ ਕਪੋਤ ਸੋ ਕੰਠ ਕਹੀ ਹਮਰੇ ਮਨ ਜੋ ਵਸੀ ਹੈ ਏਤੇ ਪੈ ਚੋਰ ਲਿਓ ਹਮਰੋ ਚਿਤ ਭਾਮ ਦਾਮਨ ਪਾਂਤ ਲਸੀ ਹੈ ਕਾਨਰ ਲੈ ਬ੍ਰਿਖ ਸੁਤਾ ਸੰਗ ਭਲੀ ਬਿਦ ਸੁੰਦਰ ਗਾਵੇ ਸਾਰੰਗ ਦੇਵ ਗੰਧਾਰ ਵਿਭਾਸ ਬਿਲਾਵਲ ਭੀਤਰ ਤਾਨ ਬਸਾਵੇ ਜੋ ਜੜ ਸੌਨਰ ਮੈ ਸੁਨ ਕੈ ਤੁਨ ਤਿਆਗ ਤਹਾ ਕਹੋ ਤਾਵੇ जो खग जात उडे नब में सुन ठाढ़ रहे धुन जो सुन पावे गुहारन संग पले भगवान सो खेलत है अर अरुणाचत ऐसे खेलत है मन आनद कह न कछु जररा मन धार कह पैसे गावत सारंग ताल बजावत श्याम कह अति सुरत ऐसे सावन की ऋतु में मनो नाचत मोरनु नाचत है खेलत है रजनी हित मैं जह थो जमुना जत कानन पान सुता वृक्ष की जह थी सो जह चंद्र पगा अभिमानन छाजित ता मह हर जी ਜਿਉ ਵਿਰਾਜਤ ਪੀਚ ਪੰਨਾ ਨਗਖਾਨਨ ਸੋ ਸੰਗੀਤ ਨਚੈ ਹਰ ਜੂ ਸੋ ਸ਼ਿਆਮ ਕਹੈ ਰਸ ਕੇ ਸੰਗ ਪੀਨੋ ਖੋਰ ਦੇ ਫੁਨ ਕੇਸਰ ਕੀ ਧੁਤੀ ਆਕਸ ਕੈ ਪਟ ਵੋੜ ਨਵੀਨੋ ਰਾਧ ਕਾ ਚੰਦਰ ਭਗਾ ਮੁਖ ਚੰਦ ਲਏ ਜਹਗਵਾਰਨ ਥੀ ਸੰਗ ਤੀਨੋ ਕਾਨ ਨਚਾਇ ਕੈ ਨੈਨਨ ਕੋ ਸਭ ਗੋਪਿਨ ਕੋ ਮਨੁ ਆ ਬ੍ਰਿਖ ਭਾਨ ਸੁਤਾ ਕੀ ਬਰਾਬਰ ਮੂਰਤ ਸਿਆਮ ਕੈ ਸੋ ਨਹੀਂ ਕਿਰਿਤ ਤੀ ਹੈ ਜਾ ਸੰਹ ਹੈ ਨਹੀਂ ਕਾਮ ਤ੍ਰਿਆ ਨਹੀਂ ਜਿਸ ਕੀ ਸਮਤੁਲ ਸਚੀ ਹੈ ਮਾਨਵ ਲੈ ਸਸਿਕੋ ਸਭਸਾਰ ਪ੍ਰਵਾਕਰਤਾਰ ਇਹੀ ਮੈਂ ਗਜਿ ਹੈ ਆਨੰਦ ਕੇ ਲਾਲ ਬਿਲਾਸਨ ਕੋ ਇਹ ਮੂਰਤ ਚਿੱਤਰ ਬਚਿੱਤਰ ਰਜੀ ਹੈ ਰਾਧਿਕਾ ਚੰਦਰ ਪਗਾ ਮੁਖ ਚੰਦ ਸੋ ਖੇਲਤ ਹੈ ਮਿਲ ਖੇਲ ਸਵੈਨ ਮਿਲ ਸੁੰਦਰ ਗਾਵਤ ਗੀਤ ਸਵੇ ਸੋ ਬਜਾਵਤ ਹੈ ਕਰ ਤਾਲ ਤਵੇਂ ਪਿਖਵੈ ਇਹ ਕੋ ਸੂ ਮੋਹ ਰਹਿ ਸਭ ਦੇਖਤ ਹੈ ਸੂਰਿਆਏ ਛਬੈ ਕਬ ਸ਼ਾਮ ਕਹੈ ਮੁਰਲੀ ਧਰਮੈਨ ਕੀ ਮੂਰਤੀ ਗੋਪਨ ਮਦ ਜਿਹ ਕੀ ਸਮ ਹੈ ਕਮਲਾ ਦੁਤੀ ਜਾ ਪਿਖ ਕਹਿ ਕਟ ਕੇ ਹਰ ਲਾਜੈ ਕਾਂਚਨ ਵੇਖ ਲਜੈ ਤਨ ਕੋ ਦੇਖ ਤੀ ਮਨ ਕੋ ਦੁਖ ਭਾਜੈ ਜਾ ਸਮ ਰੂਪ ਕੋ ਤ੍ਰਿਆ ਕਵ ਸ਼ਾਮ ਕਹੈ ਰਾਤ ਕੀ ਸਮ ਬੀਚ ਲਸੈ ਚਪਲਾ ਇਹ ਤਿਉ ਕਨ ਗਵਾਰਨ ਬੀਚ ਬਿਰਾਜੈ ਖੇਲਤ ਹੈ ਸੰਗ ਕੇ ਸਜ ਸਾਜ ਸਬੈ ਖੇਲਤ ਹੈ ਤਿਹ ਸੋ ਹਰਜੂ ਜੋ ਹੈ ਅਤੀ ਇਤਵਾਲਾ ਚੰਦਰਮੁਖੀ ਜਹ ਠਾਡੀ ਉਤੀ ਜਹ ਠਾਡੀ ਉਤੀ ਬ੍ਰਿਖ ਕੀ ਬਾਲਾ ਚੰਦਰ ਪਗਾ ਕੋ ਮਹਾ ਮੁਖ ਸੁੰਦਰ ਗਵਾਰਨ ਬੀਜ ਕਰਿਓ ਆਲਾ ਕਾਨ ਕੋ ਰੂਪ ਨਿਹਾਰ ਕੈ ਸੁੰਦਰ 모ਹੇ ਰਹੀ ਤ੍ਰਿਯ ਚੰਦਰਮੁਖੀ ਤਬ ਗਾਇ ਉਠੀ ਕਰਤਾਲ ਵਜਾਏ ਉਤੀ ਜੇ ਕਿਦੋ ਅਤ ਸੋ ਸੁਖੀ कर कहत अति ही हित नाचत पी कर आनंद ना मन बीज चुखी सब लालच त्याग दए गृह के एक श्याम के प्यार की है सो भुखी